श्लोक महला चौथा हमरे हर जग जीवना हर जपियो हर गुरमंत हर अगम अगोचर अगम हर हर मिलिया आए अचिंत हमरे जेड़े हर ने जगला ओ जगदा जीवन दे ओ सारेयां दे विचै ने सारेयां दा जग पूरे जगदा जीवन ने ओ हर जिस कोई सब हर जपियो ਹਰ ਗੁਰ ਮੂਤ ਉਹ ਹੀ ਹਰ ਅਸੀਂ ਜਪਿਆ ਜਾਂਦੇ ਹਾਂ ਜਿਹੜਾ ਸਭ ਦਾ ਜਗ ਜੀਵ ਜਿਹੜਾ ਜਗ ਦਾ ਜੀਵਨ ਹੈ ਉਸੇ ਦਾ ਅਸੀਂ ਬੁੱਤਰ ਦੜ ਕੀਤਾ ਹੈ ਹਰ ਗੁਰ ਮੂਤ ਹਰ ਗੁਰਾ ਉਹ ਅੰਦਰ ਆਤਮਾ ਦੀ ਆਵਾਜ਼ ਵੀ ਸਾਨੂੰ ਗਿਆਨ ਵੀ ਦਿੰਦਾ ਹਰ ਹਰ ਗੁਰ ਵੀ ਹੈ ਗੁਰ ਗਿਆਨ ਦੇਣ ਵਾਲਾ ਹੁੰਦਾ ਉਹ ਹਰ ਇਹ ਜੀ ਨਹੀਂ ਮੂਰਤੀ ਨਹੀਂ ਵੀ ਜਿਹੜਾ ਬੋਲਦਾ ਹੀ ਉਹ ਹਰ ਚੇਤਨ ਬੁੱਤਰ ਵੀ ਦਿੰਦਾ ਹੈ ਆਵਾਜ਼ ਵੀ ਦਿੰਦਾ ਸਭ ਘਟ ਬੋਲਦਾ ਵੀ ਹੈ ਹਰ ਅਗੰਗੋਚਰ ਅਗੰਗ ਹਰ ਹਰ ਅਗੰਗੋਚਰ हर ਕੀ ਬੁੱਧੀ ਤੋਂ ਪਰੇ ਹੈ ਹਰ ਹੋ ਜਿਹਦੀ ਅਸੀਂ ਗੱਲ ਕਰਦੇ ਹਾਂ ਜਿਹਦੀ ਤੁਸੀਂ ਗੱਲ ਮੂਰਤੀ ਬਣਾ ਕੇ ਬੈਠੇ ਹੋ ਉਹ ਅਗੰਗੋਚਰ ਹੈਗੀ ਅਗੰਗ ਹਰ ਉਹ ਹਰ ਅਗੰਗਈ ਹੈ ਹਰ ਮਿਲਿਆ ਆਏ ਜਦ ਚਿੰਤਾ ਮੁਕਤ ਹੋ ਗਏ ਅਸੀਂ ਚਿੰਤਾ ਖਤਮ ਹੋ ਗਈ ਹੈ ਅਹੰਕਾਰ ਵੀ ਖਤਮ ਹੋ ਗਿਆ ਫਿਰ ਹਰ ਮਿਲਿਆ ਜਿੰਨਾ ਚਿਰ ਚਿੰਤਾ ਰਹਿੰਦੀ ਹੈ ਹਾਲ ਮਿਲ ਸਕਦਾ ਉਹਨਾਂ ਚਿਰ ਚੋਨਾ ਚਿਰ ਅਹੰਕਾਰ ਵੀ ਰਹਿੰਦਾ ਹੈ ਹਰ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਮਲਾਕੰਤ ਹਰ ਆਪੇ ਘਟ ਘਟ ਵਰਤਦਾ ਉਹ ਹਰ ਸਾਰਿਆਂ ਘਟਾਂ ਚ ਆਵੇ ਵਰਦਾ ਸਾਰੇ ਹਿਰਦਿਆਂ ਚ ਆਵੇ ਵਰਤਦਾ ਤਾਂ ਹੀ ਜਗਦਾ ਜੀਵਨ ਹੈ ਆ ਉਹ ਹੀ ਲੈਂਦਾ ਉਹਦੇ ਸਾਹ ਲੈਣ ਕਰਕੇ ਹੀ ਜੰਗ ਜੀਵਨ ਚੱਲਦਾ ਔਰ ਆਪੇ ਘਟ ਘਟ ਵਰਤਦਾ ਔਰ ਆਪੇ ਆਪ ਬਿਆਨਤ ਉਹੋ ਹੀ ਬਿਆਨਤ ਨੂੰ ਬਿਆਨਤ ਕਿਹਾ ਹੋਇਆ ਔਰ ਆਪੇ ਸਭ ਰਸ ਭੋਗਦਾ ਸਭ ਰਸ ਵੀ ਉਹ ਭੋਗਦਾ ਔਰ ਆਪੇ ਕਮਲਾ ਕੰਤ ਔਰ ਆਪੇ ਹੀ ਕਮਲ ਜੋ ਹੈ ਗੁੱਦੀ ਆ ਉਹਦਾ ਕੰਤ है, ਆ ਕਮਲਾ ਕਹਿੰਦੇ ਨੇ ਜਿਹੜੀ ਘਟ ਉਹਦੀ ਮਾਲਕਾ ਉਹਦੀ ਰਾਣੀ ਹੈ ਉਹ ਕਮਲਾ ਗੁੱਦੀ ਔਰ ਆਪੇ ਕਮਲਾ ਕੰਤ ਉਹਦਾ ਕੰਤ ਉਹੀ ਆ ਜੀ ਔਰ ਆਪੇ ਭਿਖਿਆ ਪਾਇੰਦਾ ਹਰ ਮੰਗੈ ਹਰ ਜਨ ਸੰਤ ਅਰ ਆਪੇ ਤੇ ਕਿਆ ਪਾਣਦਾ ਸਭ ਸ੍ਰੇਸ਼ਟੂ ਪਾਈ ਜੀ ਜੰਤ ਜੀ ਜੰਤ ਨੂੰ ਪਾ ਕੇ ਤੇ ਖਿਆ ਵੀ ਉਹੀ ਨੰਦ ਤੇ ਕਿਉਂਕਿ ਮੈਂ ਨੰਦ ਸਰੀਰ ਜੇ ਚੱਲਦਾ ਤਾਂ ਤਾਂ ਖੇਲ ਮਿਲਦੀ ਹੈ ਜੰਤ ਨੂੰ ਕਿ ਸਰੀਰ ਨੂੰ ਦਾ ਸਾਲ ਆ ਨਵੇ ਹੋ ਹਾਰਨੂ ਚੱਲੇ ਫਿਰ ਇਹਨੂੰ ਕੋਈ ਖਿਆ ਮਿਲਦੀ ਖਿਆ ਤਾਂ ਆਪਣੀ ਆਪੇ ਲੈ ਲੈਂਦਾ ਪ੍ਰਸਾਦ ਆਉ ਲੈਂਦਾ ਰਾਮ ਸਰੀਰ ਤੋਂ ਉਹਦੇ ਕਰਕੇ ਉਹਦੀ ਸ਼ਕਤੀ ਨਾਲ ਚੱਲਦਾ ਹਾਂਜੀ ਹਰਦੇਵੋ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਏ ਹਰ ਦੇਵੋ ਦਾਨ ਦਿਆਲ ਦਿਆਲ ਵਗੋ ਤੇ ਮੈਨੂੰ ਦਾਨ ਦੇਵੋ ਕੀ ਦਾਨ ਦੇਵੋ ਹਰ ਬੁਲਦਾ ਹਰ ਜਨ ਸੰਤ ਤੇਰਾ ਹੀ ਪੱਲਾ ਮੰਗਦੇ ਆ ਤੇਰੀਏ ਛਲਨ ਤੈਨੂੰ ਹੀ ਮੰਗਦੇ ਹੋ ਏ ਹਰ ਤੈਨੂੰ ਹੀ ਮੰਗਦੇ ਆ ਤੇਰੇ ਯਾਣਾ ਤੈਨੂੰ ਮੁੰਦਿਆਂ ਤੇਰਾ ਸਾਥ ਮੁੰਦਿਆਂ ਅਸੀਂ ਹਰ ਕੈ ਸਦ ਤਾਂ ਤੇਰਾ ਹੀ ਸਾਥ ਮੁੰਦਿਆਂ ਤੇਰੇ ਹੀ ਹੋ ਕੇ ਰਹਿਣਾ ਚਾਹੁੰਦੇ ਹੋ ਤੇਰਾ ਸੰਗ ਸਾਥ ਮੁੰਦਿਆਂ ਇਹ ਤੈਨੂੰ ਮੁੰਦਿਆਂ ਗੱਲ ਇੱਕੋ ਪ੍ਰਭ ਆਏ ਮਿਲ ਹਮ ਗਾਵੈ ਹਰ ਗੁਣ ਛੰਤ ਜਨ ਨਾਨਕ ਕੇ ਪ੍ਰਭ ਤੁਮ ਆ ਕੇ ਬਿੜੋ ਅਸੀਂ ਤਾਂ ਤੇਰਾ ਗੁਣ ਗਾਇਨ ਕਰਦੇ ਆਂ ਅੱਛ ਜਿਹੜੇ ਲਿਖੇ ਨੇ ਤੇਰੇ ਗੁਣ ਗਾਇਨ ਕਰਦੇ ਹਾਂ ਕੇ ਸਾਨੂੰ ਮਿਲ ਲੋ ਜੀ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਹਰ ਪ੍ਰਭ ਸੱਜਣ ਵੀ ਆ ਨਾਮ ਵੀ ਉਹੀ ਹੈ ਹਰ ਹੁਕਮ ਰੂਪ ਵੀ ਉਹੀ ਹੈ ਜਦ ਬੋਲਦਾ ਤਾਨੂੰ ਬਣ ਜਾਂਦਾ ਮੈਂ ਮਨ ਤਨ ਜੋਗ ਸਰੀਰ ਮੇਰਾ ਬਨ ਮੇਰੀ ਜੋਤ ਕੀ ਹੈ ਸਰੀਰ ਕੀ ਹੈ ਉਹ ਸਰੀਰ ਨਾਮ ਹੀ ਆ ਮੇਰਾ ਮਨ ਤਨ ਇੱਕ ਹੋ ਗਿਆ ਨਾਮ ਦੇ ਵਿੱਚ ਸਮਾ ਗਿਆ ਜਾਂ ਨਾਮ ਸਮਾ ਗਿਆ ਨਾਮ ਵਿੱਚ ਸਰੀਰ ਰਹਿ ਗਿਆ ਹੁਣ ਮੇਰਾ ਮੈਂ ਰਿਹਾ ਇਹਦੀ ਕੁਝ ਉਦਲ ਦੇ ਵਿੱਚ ਸਮਾਧੀ ਭੂਮਿ ਸਰ ਉਦਲ ਜਿੱਤੇ ਜੀ। ਨਾ ਕੁਝ ਵੀ ਨਹੀਂ ਰਿਹਾ। ਮੈਂ ਨਾਮ ਹੀ ਬਣ ਗਿਆ। ਹਾਂ ਜੀ। ਆਸਾ ਗੁਰਮੁਖੀ ਪੂਰੀਆਂ ਜਨ ਨਾਨਕ ਸੁਣ ਹਰ ਧੀਰ। ਸਭ ਆਸਾਂ ਗੁਰਮੁਖੀ ਪੂਰੀਆਂ ਗੁਰਮੁਗਾਨੀਆਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਜਦ ਨਾਮ ਹੀ ਸਰੀਰ ਹੋ ਜਾਂਦਾ ਜਦ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਸਭੇ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਜਾਣਾ ਨਾਮ ਸੁਣਨਾ ਥੋੜੀ ਹਰ ਫਿਰ ਜੇ ਨਾਮ ਸੁਣਿਆ ਜਾਂਦਾ ਹੈ ਹਰ ਕਾ ਤਾ ਧੀਰਜ ਹੋ ਜਾਂਦਾ ਬੰਨੂ ਗੁਲਤ ਨਹੀਂ ਜਾਂਦਾ ਤੁਸੀਂ ਇਹ ਲੈ ਕੇ ਜਾਂਦਾ ਹੋ ਜੀ ਔੜੀ ਹਰ ਉਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਰਾਤ ਤਿੰਨ ਸੇਵੇ ਚਰਨ ਨਿਤ ਕੌਲਾ ਅਣ ਉਤਮ ਹਰਿਆ ਨਾਮ ਹੈ ਸਭ ਤੋਂ ਉਤਮ ਕੀ ਹੈ ਨਾਮ ਜਿਹੜਾ ਨਾਮ ਹਰਿਆ ਹੈ ਹਰਿਆ ਨਾਮ ਆਰਾਮ ਉਹ ਜਿਹੜਾ ਰਾਮ ਰਾਮ ਕਰਦੇ ਨੇ ਸੁੱਖਾ ਨਾਮ ਉਹਦਾਂ ਕਰਦਾ ਕਿਸੇ ਨੂੰ ਹਰਿਆ ਕਰਦਾ ਉਹ ਸੁੱਖਾ ਹੀ ਹੈ ਹਰਿਆ ਨਾਮ ਹੈ ਦਰੋਂ ਹਾਂ ਹਰ ਪੁਰਖ ਨਰੰਜਨ ਬੋਲੋ ਇਹ ਪੁਰਖ ਨਰੰਜਣਾ ਮਾਇਆ ਨਹੀਂ ਐ ਜਮਾਇ ਤੋਂ ਰਹਤਾ ਮੋਲ ਮੋਲ ਨੂੰ ਫੁੱਲ ਬੜੇ ਲੱਗਦੇ ਨੇ ਮੋਲ ਦੇ ਫੁੱਲੇ ਫੁੱਲ ਨੇ ਫੁੱਲਾਂ ਦੀਓ ਛੋਆ ਪੱਤੇ ਹੀ ਨਹੀਂ ਜੋ ਜੱਬਦੇ ਹਰ ਹਰ ਤਿੰਨ ਰਾਤ ਜਿਹੜੇ ਇਹਨੂੰ ਜਾਣਦੇ ਨੇ ਨਾ ਸੁਣਦੇ ਨੇ ਹਾਲੂ ਜਿੰਨ ਰਾਤ ਸਮਝੇ ਲਗੇ ਰਹਿੰਦੇ ਨੇ ਸਮਝਣ ਵਾਸਤੇ ਜਾਣਨ ਵਾਸਤੇ ਇਸ ਦੇ ਵਿੱਚ ਆਪਣੇ ਅੰਦਰੋਂ ਇਹਨਾਂ ਸੇਵ ਚਲਨ ਮਿੱਤ ਕੌਲਾ ਉਹਨਾਂ ਦੀ ਜਿਹੜੀ ਬੁੱਧੀ ਹੈ ਨਾ ਉਹ ਫਿਰ ਇਹ ਗੁਰ ਕੇ ਚਾਣਾ ਨੂੰ ਦਿਨ ਸੇਵਦੀ ਰਹਿੰਦੀ ਹੈ ਉਹ ਭਾਣੇ ਤੇ ਚੱਲਦੀ ਹੈ ਉਹ ਗੁਣਾਂ ਦਾ ਕਰਦੀ ਹੈ ਉਹ ਗੁਣ ਕਾਇਮ ਹੈ ਉਹ ਗੁਣਾਂ ਦਾ ਆਇਆਂ ਕਰਦੀ ਹੈ ਗੁਣਾਂ ਦਾ ਵਪਾਰ ਕਰਦੀ ਹੈ ਆ ਨਾਮ ਦਿੱਤੀ ਆ ਇਹ ਨਾਮ ਲੱਗੀਏ ਇਹ ਸੇਵਾ ਹਾਂਜੀ ਔਲਾ ਬੁੱਧੀ ਨੂੰ ਕਿਹਾ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਨਿਤ ਸਾਰ ਸੰਮਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ ਬੁਝੇ ਜਿਸ ਆਪ ਬੁਝਾਈ ਸੀ ਜਿਸ ਸਤਗੁਰ ਪੁਰਖ ਪ੍ਰਭ ਸੋਲਾ ਇਤਿਹਾਸ ਸਵਾਲ ਨੇ ਸਭ ਜੀ ਸਾਰੇ ਜੀ ਇਹ ਸਾਰੂਪ ਸਮਝ ਸਕਦੇ ਨੇ ਸਾਲ ਲੰਬ ਦੇ ਵਿੱਚ ਸਾਰੇ ਸਮਝ ਜਾਂਦੇ ਨੇ ਜਿਹਨਾਂ ਨੂੰ ਇਹਦਾ ਗਿਆਨ ਹੋ ਜਾਂਦਾ ਸਮਝ ਜਾਂਦੇ ਨੇ ਜੀ ਜੰਤ ਹਰ ਵਸਥਾ ਡਿਖਤ ਸਭ ਜੋਲਾ ਜਿਹੜਾ ਇਹਦੇ ਵਿੱਚ ਨਿਕਲ ਕੇ ਆ ਕੇ ਨਾ ਜੀ ਜੰਤ ਜਿਹੜਾ ਨਾਮ ਦੇ ਡਿਖਤ ਵਸ ਜਾਂਦਾ ਉਹ ਸਮਝ ਜਾਂਦਾ ਜੇ ਦਾ ਚੰਦਨ ਨੇ ਦੇਖ ਰਿਹਾ ਜਾਂਦਾ ਉਹ ਚੰਦਨ ਹੀ ਹੋ ਜਾਂਦਾ ਚੰਦਨ ਵਾਲੇ ਗੁਰੂ ਵਿੱਚ ਪ੍ਰਗਟ ਪੈਦਾ ਹੋ ਜਾਂਦੇ ਨੇ ਸੋ 부ਝੇ ਜਿਸ ਆਪ 부ਝਾਈ ਸੀ ਜਿਸ ਸਤਗੁਰੂ ਪੁਰਖ ਪ੍ਰਭ ਸੋਲਾ ਉਹ 부ਝਦਾ ਇਹਨਾਂ ਗੱਲਾਂ ਨੂੰ ਜਿਹੜੀਆਂ ਉੱਤੇ ਕਈਆਂ ਗਈਆਂ ਨੇ ਇਹ ਸਾਰੀਆਂ 부ਝਾਰਤਾਂ ਨੂੰ 부ਝਣ ਵਾਲੀਆਂ ਦੀਆਂ ਨੇ ਜਿਸ ਆਪ 부ਝਾਈ ਸੀ ਜੇ ਕੋ ਨਾਮ ਦੇ ਨਾਲ ਜੀ ਉਹ 부ਝ ਸਕਦਾ ਨਾ ਉਹ ਨਾਲ ਬੁਝਿਆ ਜਾ ਸਕਦਾ ਹੈ ਗੁਰਬਾਣੀ ਨੂੰ ਸੁਣ ਕੇ ਸਮਝਿਆ ਜਾ ਸਕਦਾ ਹੈ ਪੜ੍ਹਿਆ ਜਾ ਸਕਦਾ ਜੋ ਚੀਜ਼ ਪੜ੍ਹੀ ਜਾ ਸਕਦੀ ਹੈ ਸਮਝੀ ਜਾ ਸਕਦੀ ਜੋ ਬਿਨ ਕਰਨਾ ਤੇ ਸੁਣੀਓ ਉਹ ਉਹ ਉਹ ਹੈ ਜਿਸ ਸਤਗੁਰ ਪ੍ਰਖ ਸਭ ਸੋਲਾ ਜਿਹੜਾ ਸਤਗੁਰ ਪ੍ਰਖ ਹੈ ਉਹ ਪੂਰੀਆਂ ਇਹ ਸਭ ਪ੍ਰਕਾਸ਼ ਦੀ ਇਹ ਕਰ ਦਵੇ ਸੋਖ ਕਰ ਦਵੇ ਜਿਹਦੀ ਬੁੱਧੀ ਖੋਲ ਦਵੇ ਉਹ ਪਰਬ ਦੇ ਪਰਦੇ ਖੋਲ ਦੇ ਬੇਜੀ ਦੇ ਉਹ ਬੁਝਣਨ ਪਰਬ ਕੇ ਪਰਦੇ ਸਤਗੁਰ ਕੋਲ ਨੇ ਠੀਕ ਹੈ ਜੀ ਜੋ ਲੱਗ ਜਾਵੇ ਉਹਦੇ ਨਾਲ ਜੋ ਜਾਵੇ ਨਾਮ ਨਾਲ ਅੱਛਾ ਜੀ ਤੇ ਸੋਲਾ ਇਹਨੂੰ ਸੌਖਾ ਕਰ ਦਵੇ ਬੁਝਣਾ ਜਦੋਂ ਆਪੇ ਬੁਝਾਉਣਾ ਫਿਰ ਸੌਖਾ ਹੋ ਜਾਂਦਾ ਉਹਨੂੰ ਬੁਝਣ ਹੁਝਾਰ ਤੋਂ ਹੁੰਦੀ ਆ ਉਹਨੂੰ ਸੌਖੀ ਕਰ ਦਿੰਦਾ ਬੁਝਣੀ ਲੋ ਗਾਵੋ ਗੁਣ ਗੋਬਿੰਦ ਹਰੇ गोविन्द हरे गोविन्द हरे गुण गावत गुणी समोल्ला सब गावो गुण गोविन्द हरे गुण गोविन्द हरे गोविन्द हरे गुण गावत गुणी समोल्ला गुण गाਉਦਾ ਗਉਣਾ ਹਰਦੇ ਉਹ ਹਰਦੇ ਗੁਣਾਂ ਵੀ ਸਮਾ ਜਾਂਦਾ ਗੁਣ ਦੇ ਵਿੱਚ ਹੀ ਸਮਾ ਜਾਂਦਾ ਗੁਣ गावत गुणी ਗੁਣੀ ਨਾ ਤਾਂ ਹੰਦੇ ਵਿੱਚ ਸਮਾ ਜਾਂਦਾ ਉਹਦਾ ਉਹਦੇ ਗੁਣ ਗਾਉਂਦੇ। ਸਮੋਲਾ ਸਮਾ ਜਾਣਾ। ਠੀਕ ਹੈ ਜੀ। ਕਹਿੰਦਾ ਪਾਵਾ ਵੀ ਹਰ ਦੇ ਅਖੀਰ 'ਚ ਗਾਵੋ ਜਾਂ ਬੋਲੋ ਜਾਂ ਚਬਣ ਇਸ ਤਰ੍ਹਾਂ ਦੇ ਸ਼ਬਦ ਆ ਰਹੇ ਆ ਸਭ ਗਾਵੋ ਗੁਣ। ਗੋਬਿੰਦ ਆਪਣਾ ਮੂਲ ਹੈ ਜੀ। ਹਾਂਜੀ ਹਾਂਜੀ। ਠੀਕ ਹੈ। ਉਹੀ ਹਰਾ-ਭਰਾ ਕਰ ਰਿਹਾ ਸਭ ਨੂੰ। ਉਹ ਜਿਹੜਾ ਗੋਬਿੰਦ ਹੈ ਜਿਹੜਾ ਹਰਾ-ਭਰਾ ਕਰ ਰਿਹਾ ਉਹਦੇ ਗੁਣ ਗਾਵੋ ਹੈ ਹਾਂਜੀ। ਗੁਣ ਗਾਵਤ ਗੁਣੀ ਸਮੋਲਾ ਗੁਣ ਕਾ ਗੁਣੀ ਸਮਾਵਣਿਆ ਹੈ ਜੀ ਜੀ ਇੱਥੇ 6 ਵੀ ਪੌੜੀ ਸਮਰੱਥੀ ਹੈ ਜੀ